ਜੋ ਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਾਂ ਹਰ ਦਾਸਾਂ ਨਾਲ ਮੇਰੀ ਪ੍ਰੀਤ ਹੈ ਹਰ ਦਾਸਾਂ ਦੇ ਨਾਲ ਮੇਰੀ ਮਿੱਤਰਤਾ ਹੈ ਜਿਵੇਂ ਜੰਤੀ ਆ ਜਿਹੜਾ ਸਰੀਰ ਹੈ ਇਹਦੇ ਨਾਲ ਪ੍ਰੇਮਾ ਨਾਲ ਆਤਮਾ ਦਾ ਮੇਰਾ ਮੇਰੀ ਪ੍ਰੀਤ ਹੈ ਹਰ ਕੇ ਇਹ ਹਰ ਦਾਸਨ ਕੈ ਵਸ ਹੈ ਦੇ ਵਸ ਹੈ ਨਾ ਹਾਂਜੀ ਜਿਹੜੀ ਅੰਦਰ ਜੋਤ ਹੈ ਸਰੀਰ ਦੇ ਉਹਦੇ ਵਸ ਵਿੱਚ ਸਰੀਰ ਹੈ ਇਹ ਮੇਰੀ ਆਤਮਾ ਹਰ ਕੇ ਦਾਸਾਂ ਦੇ ਵਸ ਵਿੱਚ ਹੈ ਮੇਰਾ ਮਨ ਹਰ ਕੇ ਦਾਸਾਂ ਦੇ ਵਸ ਵਿੱਚ ਜੰਤੀ ਚੇਤਨਾ ਜੰਤ ਜਿਹਾ ਜਿਹੜਾ ਹੈ ਸਰੀਰ ਦੇ ਠੀਕ ਹੈ ਜੀ ਹਰ ਕੇ ਦਾਸ ਹਤਿਆਏ ਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰ ਕੇ ਸੁਣੋ ਪ੍ਰਭ ਜਗ ਮੈਂ ਵਰਸੈ ਮਹਿ ਇਹ ਹਰ ਦਾਸ ਨੇ ਨਾ ਉਹਨਾਂ ਦਾ ਆਪਣਾ ਮੂਰ ਨਾਲ ਨਹੀਂ ਹੁੰਦਾ ਉਹਨਾਂ ਦਾ ਪ੍ਰੇਮ ਹੁੰਦਾ ਹੈ ਜਿਹੜਾ ਹਰ ਦਾਸ ਹੈ ਉਹਦੇ ਨਾਲ ਪ੍ਰੇਮ ਹੁੰਦਾ ਹੈ ਉਹਨਾਂ ਦਾ ਜਿਵੇਂ ਧਰਤੀ ਜਿਹੜੀ ਨਾਲ ਪ੍ਰੇਮ ਕਰਦੀ ਹੈ ਉਹਨੂੰ ਚਾਹੁੰਦੀ ਇਹ ਚਾਹੁੰਦੇ ਹੁੰਦੇ ਨੇ ਕਿ ਇਹ ਧਰਤੀ ਮੇਹਨੂ ਚਾਹੁੰਦੀ ਹੈ ਐ ਉਹਨਾਂ ਦੇ ਉਹ ਜਿਹੜਾ ਉਪਦੇਸ਼ ਕਰਦੇ ਨੇ ਉਹਨਾਂ ਵਾਸਤੇ ਉਹ ਐ ਇਹ ਜਾਂ ਹੁੰਦਾ ਧਰਤੀ ਨੂੰ بارش ਭਰੀ ਹਰੀ ਭਰੀ ਹੋ ਜਾਂਦੀ ਹੈ ਸ਼ਾਂਤ ਠੰਡੀ ਹੋ ਜਾਂਦੀ ਹੈ ਐ ਇਹਦਾ ਠੰਡਾ ਕਰਦਾ ਸਤਗੁਰ ਦਾ ਉਪਦੇਸ਼ ਉਹ ਇਸ ਕਰਕੇ ਸਾਡਾ ਪ੍ਰੇਮ ਉਹਦੇ ਅੰਦਰ ਉਹਦੀ ਛਾਪੋ ਖੈਦਰ ਜੀ ਉਹਨਾਂ ਦੇ ਨੂਰਾਫ ਦੀ ਕਿਲੇ ਹਰ ਕੇ ਦਾਸ ਨੇ ਠੀਕ ਹੈ ਜੀ ਜੋ ਕੀ ਉਸਤਤ ਹੈ ਸਾ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨਕਾ જયਕਾਰ ਕਰਾਈ ਜਿਹੜੀ ਵਡਿਆਈ ਕੀਤੀ ਹੋਈ ਹੈ ਹਰ ਕੇ ਦਾਸਾਂ ਨੇ ਉਹ ਪਰਮੇਸ਼ਰ ਦੀ ਕੀਤੀ ਹੋਈ ਆਪਣੀ ਨਹੀਂ ਕੀਤੀ ਹੋਈ ਵਡਿਆਈ ਉਹਨਾਂ ਨੇ ਵਿਅਕਤੀ ਵਿਸ਼ੇਸ਼ ਦੀ ਵਡਿਆਈ ਨਹੀਂ ਉਹ ਕਰਦੇ ਹੈਗੇ ਵਡਿਆਈ ਉਹ ਨਰਾਕਾਰ ਦੀ ਕਰਦੇ ਨੇ ਇੱਕ ਦੀ ਵਡਿਆਈ ਕਰਦੇ ਨੇ ਉਹਨਾਂ ਜੋਤ ਦੀ ਵਡਿਆਈ ਕਰਦੇ ਨੇ ਕਾਖਾ ਨੇ ਜਿਵੇਂ ਨਾਨਗਾਨੇ ਜਿਹੜੀ ਵਡਿਆਈ ਕੀਤੀ ਆ ਉਹ ਆਪਣੇ ਨਹੀਂ ਕੀਤੀ ਹੈ ਕਿਸੇ ਆਦਮੀ ਨੇ ਨਹੀਂ ਕੀਤੀ ਉਹਨਾਂ ਜੋ ਅੱਧੀ ਕੀਤੀ ਹੈ ਜਿਹੜਾ ਇੱਕ ਆ ਲੈ ਦੀ ਵਡਿਆਈ ਕੀਤੀ ਹੈ ਜਨਕਾ જયਕਾਰ ਕਰਾਈ ਹਾਂ ਹਲੋ ਆਪਣੀ ਵਡਿਆਈ ਤਾਂ ਚੰਗੀ ਲੱਗਦੀ ਹੈ ਇਸ ਕਰਕੇ ਹਰ ਦਾ જયਕਾਰ ਕਰਾ ਦਿੰਦਾ ਹਰ ਦੇ ਜਾਂਦੀ ਹੈ ਉਹਨਾਂ ਦੀ ਫਰੀ ਦੁਨੀਆ ਤੇ ਮਾਰਗ ਜਹਾਨ ਉਹਦੀ ਕਰਦਾ ਜਿਹੜਾ ਅਰਕੀ ਵੜਾਈ ਕਰਦਾ ਉਹਦਾ ਜਾਕਾਰ ਹੁੰਦੀ ਹੈ ਜਾਕਾਰ ਕੀ ਹੈ ਕਿ ਹਾ ਵੇ ਉਹ ਬਾਜੀ ਜਿੱਤ ਗਿਆ ਜਨਮ ਉਹਨੇ ਜਨਮ ਪਦਾਰਥ ਜਿੱਤ ਕੇ ਗਿਆ ਉਹ ਜੈਕਾਰ ਇਹੀ ਕਾਲ ਜਿੱਤ ਲਿਆ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰਿ ਦਾਸ ਹੈ ਹਰ ਪੈਜ ਰੱਖੋ ਭਗਵਾਨ ਜੋ ਹਰ ਆ ਨਾਮ ਤੇ ਆਉਂਦੇ ਜਿਹੜੇ ਹਰ ਦਾ ਨਾਮ ਨੇ ਉਹ ਇੱਕ ਨੇ ਸਮਾਨ ਰਹਿੰਦੇ ਨੇ ਉਹ ਉਹਨਾਂ ਦੇ ਅੰਦਰ ਦੁਈ ਭਾਵਨਾ ਦੁਆਇਤ ਸਮਝਦੇ ਨੇ ਔਰ ਇੱਕ ਰਸ ਰਹਿੰਦੇ ਨੇ ਬੇਸ਼ਕ ਉਹਨਾਂ ਦਾ ਮਨ ਟਿਕਿਆ ਰਹਿੰਦਾ ਹਰ ਹਰ ਜਨ ਇੱਕ ਸਮਾਨ ਹਰ ਔਰ ਹਰ ਜਨ ਇੱਕ ਸਮਾਨ ਹੋ ਗਿਆ ਨਾ ਮਨ ਔਰ ਚਿੱਤ ਹਾਂ ਹਰ ਉਹ ਹਰ ਜੈਸਾ ਹੀ ਹੁੰਦਾ ਹਰ ਵਾਸਤੇ ਜਿਵੇਂ ਹਰ ਦਾ ਸੁਭਾਅ ਉਹਦਾ ਸੁਭਾਅ ਹੁੰਦਾ ਜਿਵੇਂ ਹਰ ਸਾਰਿਆਂ ਨੂੰ ਆਪਣਾ ਸਮਝਦਾ ਉਹ ਸਾਰਿਆਂ ਨੂੰ ਆਪਣਾ ਸਮਝਦਾ ਦੇ ਹੋਗੇ ਦੋਹੇ ਮਿਲ ਕੇ ਐਨੀ ਗੱਲ ਹੋਰੀ ਨਹੀਂ ਕੀ ਸਮਾਨ ਲਈ ਹੈ ਲਵ ਜਿਹੜਾ ਸਮਾਨ ਸ਼ਬਦ ਹੈ ਨਾ ਸਮਾਨ ਸੁਭਾਅ ਅਕਾਰ ਕੇ ਸਮਾਨ ਹੈ ਉਹ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰ ਨਹੀਂ ਬਣਿਆ ਉਹ ਹਰ ਵਰਗਾ ਬਣਿਆ ਵਿਚ ਵਰਗਾ ਲੱਗਿਆ ਸਭਾ ਅਗਰ ਕੇ ਉਹਦੇ ਵਰਗਾ ਅਸਮਾਨ ਤਾਂ ਉਹਦੇ ਅੰਦਰੋਂ ਮਿਟ ਗਈ ਅਸਮਾਨ ਤਾਂ ਨਹੀਂ ਰਹੀ ਉਹਦੇ ਅੰਦਰ ਭਈ ਅਸੀਂ ਸਿੱਖਾਂ ਨੂੰ ਚੰਗਾ ਸਮਝੀਏ ਗਾਇਰ ਸਿੱਖਾਂ ਨੂੰ ਨਾ ਚੰਗਾ ਸਮਝੀਏ ਜੀ ਸਭ ਕੋ ਮੀਤਾਂ ਸਾਜਨ ਆਏ ਗੱਲ ਠੀਕ ਹੈ ਜੀ ਜਨ ਨਾਨਕ ਹਰ ਦਾਸ ਹੈ ਹਰ ਪੈਜ ਰੱਖੋ ਭਗਵਾਨ ਹਰ ਨਾਨਕਾਰ ਦਾ ਹਰ ਦਾਸ ਹੈ ਜਿਹੜਾ ਜਾਣ ਹੈ ਉਹ ਹਰ ਦਾਸ ਹੈ ਹਾਲ ਨਹੀਂ ਹੈ ਜਾਨੋ ਹਰ ਦਾਸ ਹੈ ਉਹ ਜੋ ਹਰ ਸੋਚਦਾ ਉਹ ਹੀ ਇਹ ਸੋਚਦਾ ਹੈ ਹਰ ਮਾਗ ਰਿਹਾ ਉਹ ਹਰ ਦਾਸ ਹਰ ਕੋਈ ਫਰਕ ਨਹੀਂ ਹੈ ਅੱਜ ਪੈਜ ਰੱਖੋ ਭਗਵਾਨ ਦਾਸ ਬਣਿਆ ਉਹਨੂੰ ਕਹਿੰਦਾ ਮੇਰੀ ਪੈਜ ਰੱਖ ਤੂੰ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਮੇਰੇ ਤੇ ਕਿਰਪਾ ਰੱਖ ਇਹ ਮਨ ਮੇਰਾ ਡੋਲੇ ਨਾ ਹੁਣ ढोलन ਤੇ رکھੋ ਪ੍ਰਭੂ ढोलन ਤੇ ਰੱਖੋ ਮਾਇਆ ਜਨਾ ਫੇਰ ਚਲੇ ਜਾਵੇ ਫੇਰ ਰੱਖੋ ਇਕਬਾਲ ਮਾਇਆ ਛੱਡ ਕੇ ਆ ਕੇ ਦੁਆਰੇ ਛਾਣਾ ਖਿਲਾਵੇ ਮਾਇਆ ਦੇ ਚੱਲੇ ਦਾਸੇ ਬਣਿਆ ਰਹੇ ਇਹਦੇ ਗੁਰੂ ਗੁਰੂ ਬਣਾ ਦੀ ਇੱਛਾ ਹੀ ਨਾ ਪੈਦਾ ਹੋਵੇ ਸੰਤ ਕਾਹਨ ਹੋਵੇ ਇਹਦੇ ਅੰਦਰ ਭਗਵਾਨ ਭਗਵਾਨ ਕੌਣ ਹੈ ਜੀ ਭਗਵਾਨ ਦਲਾ ਹਾਰੇ ਗਿਲਾ ਬਿੱਤੂ ਮੈਨੂੰ ਆਪਣਾ ਨਾਲ ਜੋੜ ਕੇ ਰੱਖੀ ਮੇਰੇ ਨਾਲ ਤੂੰ ਹਮੇ ਨੂੰ ਥੱਕਾ ਦੇ ਨਹੀਂ ਘਰੋਂ ਪਰਦੀ ਨਹੀਂ ਹਰ ਤੇ ਭਗਵਾਨ ਇੱਕੇ ਜੀ ਹੈ ਇੱਥੇ ਵਾਹ ਭਗਵਾਨ ਹਰ ਦੇਖੋ ਨਾ ਸੋਈ ਪ੍ਰਖਮਗੋਵਾਨ ਭਗਵਾਨ ਦਾ ਲਾਹਰ ਹੈ ਨੰਦਲਾ ਤੋਂ ਇਹ ਉਹਦਾ ਹੈ ਅੱਛਾ ਜਨ ਨਾਨਕ ਹਰ ਦਾਸ ਇਹ ਹੁਣ ਕੌਣ ਬੋਲ ਰਿਹਾ ਜੀ ਮਨ ਬੋਲ ਰਿਹਾ ਜਨ ਹੋ ਜਨ ਬੋਲ ਹਾਂ ਵਨਵੋ ਜੀ ਬੁੱਧੀ ਬੋਲ ਜੀ ਜਨ ਹੋ ਗਿਆ ਹਾਂ ਹਾਂ ਹਰ ਥੋੜੀ ਕਾ ਨਾ ਮੇਰੀ ਪੈਜ ਰੱਖੋ ਭਗਵਾਨ ਦਾਲੇਗਾ ਉਹ ਕਾਗਜ਼ ਠੀਕ ਹੈ ਤੇਰੇ ਸਾਡੇ ਭਗਵਾਨ ਠੀਕ ਹੈ ਜੀ ਅੱਛਾ ਇੱਥੇ ਹੁਣ ਜਨ ਤੇ ਵੀ ਔਂਕਰ ਨਾਨਕ ਤੇ ਵੀ ਔਂਕਰ ਜਾਨਾ ਨਾਲ ਕੱਡੋ ਅੱਡ ਕਰਨਾ ਨਾਲ ਕਾ ਲਧਾਰੀ ਹੈ ਜਨ ਕਿਸੇ ਭਗਤ ਵਾਸਤੇ ਵੀ ਆ ਸਕਦਾ ਜੇ ਨਾਨਕ ਤੇ ਲੱਗੂਗਾ ਜੇ ਜਨ ਨਾਨਕ ਨਾਲ ਜੁੜਿਆ ਹੈਗਾ ਤਾਂ ਜਨ ਤੇ ਓਂਕਰ ਲੱਗਦਾ ਜੇ ਨਾਨਕ ਤੇ ਨਹੀਂ ਫਿਰ ਓਂਕਰ ਕਿਹਦਾ ਜੇ ਵਾਸਤੇ ਸਰਵਪਤੀ ਲਫਜ਼ ਹੈ ਬਲਕਿ ਜਨ ਤੇ ਓਂਕਰ ਜੇ ਨਾ ਹੋਵੇ ਤਾਂ ਠੀਕ ਹੈ ਜਨ ਬਹੁਵਚਨ ਚ ਆ ਸਕਦਾ ਜੇ ਨਾਨਕ ਤੇ ਓਂਕਰ ਛੱਡ ਕੇ ਜਨ ਤੇ ਓਂਕਰ ਰਹਿਦੀਏ ਫਿਰ ਇੱਕ ਵਚਨ ਲੈ ਜਾਊਗਾ ਆਇਆ ਇਹ ਫਿਰ ਜਾਂ ਤਾਂ ਫਿਰ ਜੰਤੇ ਔਕੜ ਨਹੀਂ ਜਾਈਦਾ ਜਨ ਜਿਹੜਾ ਹੈਗਾ ਫਿਰ ਨਾਨਕ ਤੇ ਕਿਉਂ ਹੈਗਾ ਔਕੜ ਹਾਂ ਬਸ ਜੰਤੇ ਔਕੜ ਨਹੀਂ ਜਾਈਦਾ ਨਾਨਕ ਤੇ ਔਕੜ ਠੀਕ ਹੈ ਉਹ ਇਹ ਤਾਂ ਗਲਤੀਆਂ ਪਤਾ ਨਹੀਂ ਕਿੱਥੇ ਕਿੱਥੇ ਕੀਤੀਆਂ ਆਪਾਂ ਇਹ ਤਾਂ ਵਿਚਾਰਨ ਦਾ ਲਗ ਮਿਸ਼ਾ ਹੋ ਗਿਆ ਹੈ ਕਰੀ ਹੈ ਜੁੱਤੀਆ ਵੀ ਕਰਦਾ ਸੁਧ ਲਿਖਿਆ ਜਾਂਦਾ ਰਿਹਾ 12 ਦੇ ਵਿੱਚ ਤਾਂ ਖਾਸਾ ਉੱਤੇ ਸੁਧ ਲਿਖਿਆ ਜਾਂਦਾ ਰਿਹਾ 100 ਆਖੀ ਉਹ ਤਾਂ ਲਿਖਿਆ ਵੀ 12 ਦੇ ਕੀਰਜ ਸੁਧ ਲਿਖਿਆ ਹੁੰਦਾ ਆ ਜੀ ਹਾਂ ਸੁਧਨ ਕੇ ਉਹਨਾਂ ਕਾ ਤੀਨ ਸੁਧ ਕੀਤੀ ਹੁੰਦੀ ਹੈ ਸਾਰੇ ਆਗਮੀਆਂ ਨਾਨਕ ਪ੍ਰੀਤ ਲਾਈ ਤਿਨੀ ਸੱਚ ਹੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਜਿਹਨੇ ਸੱਚ ਨਾਲ ਪ੍ਰੀਤ ਲਾ ਨਾ ਉਹ ਕੰਦੇ ਸਕਦਾ ਸੱਚ ਤੋਂ ਬਿਨਾਂ ਜਨਮ ਦੀ ਉਹ ਬਗੀਦੀ ਸੱਚ ਨੂੰ ਪ੍ਰੀਤ ਕੋਈ ਵੀ ਲਾਲਵੇ ਉਹ ਰਹਿ ਸਕਦਾ ਇਹ ਤਾਂ ਸੱਚ ਵਾਲਾ ਮਾਇਆ ਨਾਲ ਛੁੱਟ ਕੇ ਨਹੀਂ ਰਹਿ ਸਕਦਾ ਮਾਇਆ ਨਹੀਂ ਉਹਨੂੰ ਠੀਕ ਹੈ ਜੀ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਸਤਗੁਰ ਜੇ ਮਿਲ ਜੇ ਤੱਕ ਕੀ ਹੈ ਉਹਦੀ ਕੀ ਹੈ ਕਿਵੇਂ ਲੱਗਦੀ ਹੈ ਕਿ ਸਤਗੁਰੂ ਦੇ ਉਹ ਸਮਝਾਉਂਦੀ ਹੈ ਇਸ ਵਲ ਵੀ ਕਪੂਰਾ ਫਾਇਆ ਹਰ ਦਾ ਸਦਸਨ ਰਸਾਈ ਹਰ ਦਾ ਰਸ ਫਿਰ ਫੇੜ ਆਉਂਦਾ ਫੇਰਾ ਆਉਂਦਾ ਹਰ ਦਾ ਰਸਨ ਨੂੰ ਬੁੱਧੀ ਨੂੰ ਤਾਵਾ ਨਸਿਲੀ ਰਸਨਾ ਬਣਦੀ ਹੈ ਹਾਂ ਤਾਉ ਸਰਾਸੀ ਬਣਦੀ ਹੈ ਸੰਤ ਸਾਜਣ ਪਏ ਸਰਸੇ ਗੱਲ ਚ ਬੋਲਦੀ ਹੈ ਉਹ ਜੋ ਰਸ ਆਉਂਦਾ ਨਾਮ ਦਾ ਰਸਨ ਰਸਾਈ ਜਦ ਹੋ ਜਾਂਦੀ ਹੈ। ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਜੀ ਜੰਤ ਸਰਬਤ ਨਾਉ ਤੇਰਾ ਰਾਤ ਹੋਵੇ ਦਿਨ ਹੋਵੇ ਪ੍ਰਭਾਤ ਹੋਵੇ ਕਰਨਾ ਇੱਛਾ ਹੈ ਕਰਨ ਦੀ ਇੱਛਾ ਹੈ। ਜਸੇ ਕਰਦਾ ਰਾਂ ਇਹ ਇੱਛਾ ਮੇਰੀ। ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਜੀ ਜਾਨ ਤੇ ਜਿਹੜੇ ਇਹ ਸਾਰਿਆਂ ਦਾ ਹੀ ਧਿਆਨ ਤੇਰੇ ਨਾਮ ਤੇ ਜਿਵੇਂ ਹੋਰਨਾਂ ਦਾ ਇਹ ਵੀ ਮੇਰਾ ਵੀ ਰਹੇ ਤੇਰਾ ਵੀ ਧਿਆਨ ਅਸਰੇ ਜੀ ਜਾਨ ਤੇ ਸਾਰੇ ਤੇਰੇ ਹੀ ਨੇ ਤੇਰਾ ਦਤਾ ਖੰਦ ਮੇਰੇ ਵਾਸਤੇ ਨੇ ਸਾਰੇ ਜੀ ਜਾਨ ਤੇਰੇ ਫੈਲਾ ਕੀਤੇ ਨੇ ਤੂੰ ਉਹਨਾਂ ਦਾ ਧਿਆਨ ਕਰਦੇ ਨੇ ਜਿਵੇਂ ਤੇਰਾ ਤਾਂ ਧਿਆਨ ਲੈਂਦਾ ਸਾਡਾ ਜੀ ਜਾਨ ਤਾਂ ਮੇਰੇ ਕੋਲ ਨੀ ਆ ਪਰ ਮੇਰਾ ਧਿਆਨ ਤੇਰੇ ਤੇ ਰਹੇ ਮੇਰੀ ਇੱਛਾ ਠੀਕ ਹੈ ਜੀ ਜੀ ਜੰਤ ਸਰਬਤ ਨਾਉ ਉਹਨਾਂ ਨੂੰ ਧਿਆਉਣਾ ਚਾਹੀਦਾ ਇਹ ਗੱਲ ਕਹਿਣਾ ਚਾਹੁੰਦੇ ਆ ਨਾਉ ਤੇਰਾ ਧਿਆਉਣਾ ਹੋ ਤੇਰੇ ਧਿਆਨ ਦਿੱਤਾ ਖਾਵਣਾ ਤੇ ਤੇਰਾ ਦਿੱਤਾ ਖਾਵਣ ਦੇ ਧਿਆਨ ਰੱਖਣਾ ਚਾਹੀਦਾ ਹੋਰ ਕਾਲੇ ਧਿਆਨ ਕਰਦੇ ਨੇ ਕਿਉਂ ਕਰਦੇ ਨੇ ਹੋਰ ਜੇ ਕੀ ਮਤਲਬ ਹੋਰ ਕਰਨ ਦਾ ਠੀਕ ਹੈ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦਾਤਾ ਦੇ ਦਾਤਾਰ ਤੇਰੇ ਦਿੱਤਾ ਖਾਣੇ ਜਦ ਤੇਨ ਵੀ ਤੇਰੇ ਤੇ ਰਹਿਣਾ ਚਾਹੀਦਾ ਹੋਰ ਜਗ੍ਹਾ ਕਿਉਂ ਜਾਵੇ ਧਿਆਨ ਜੇ ਤੇਰੀ ਇੱਛਾ ਹੀ ਨਹੀਂ ਕੋਈ ਉੱਥੇ ਧਿਆਨ ਸੰਗੀ ਆ ਭਾਗਤ ਜਨਾ ਦੀ ਸੰਗਤ ਕਰਕੇ ਪਾਪ ਜਿਹੜੇ ਨੇ ਹੁਕਮ ਦਾ ਵਿਰੋਧ ਜਿਹੜਾ ਕਰਦਾ ਮਨ ਇਹ ਪਾਪ ਹੈ ਗਵਾਲ ਇਹਨੂੰ ਕਿਹਾਕ ਦੇਣਾ ਗੋਹਣ ਵਿੱਚੋਂ ਖਤਮ ਕਰਨਾ ਆਪਣੀਆਂ ਆਪਣਾ ਭਾਣਾ ਅੰਦਰੋਂ ਖਤਮ ਕਰ ਦੇਣਾ ਆਪਣੀਆਂ ਛਾਣ ਖਤਮ ਕਰ ਦੇਣਾ ਇਹਦੇ ਭਾਣਾ ਹੀ ਕਰਕੇ ਮੰਨਣਾ ਇਹ ਪਾਪ ਗੋਹਣ ਭਗਤ ਜਨਾਂ ਦਾ ਸੰਗਤ ਵਿੱਚ ਸੰਭਵ ਹੈ। ਸਤਿਗੁਰ ਦੀ ਸੰਗਤ ਵਿੱਚ ਸੰਭਵ ਹੈ। ਨਾਨਕ ਸਦ ਬਲਹਾਰੈ ਬਲ ਬਲ ਜਾਵਣ ਜਨਾਨਕ ਸਤਿ ਬਲਿਆਰੇ ਜਨਾਨਕ ਤਾਂ ਸਦਾ ਬਲਿਆਰ ਜਾਂਦਾ ਬਲ ਬਲ ਜਾਂਦਾ ਸਤਗੁਰ ਤੋਂ ਜੀ ਦੀ ਸੰਗਤ ਨਾਲ ਸਾਰੇ ਪਾਪ ਗੋਏ ਜਾਂਦੇ ਨੇ ਹੈ ਕਹਿੰਦਾ ਪਾਵਾ ਕਿ ਸਭ ਜਾਣਾ ਚਾਹੀਦਾ ਸਤਗੁਰ ਤੋਂ ਕਿਉਂਕਿ ਉਹਦਾ ਹਾਂਜੀ ਹਾਂਜੀ ਥੋੜਾ ਜਿਹਾ ਇਹਦਾ ਪੈਂਦਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਕੀ ਉਹ ਧਿਆਰੇ ਆ ਕਿ ਉਹਨੂੰ ਚਾਹੀਦਾ ਯਾਹੋ ਦੇ ਨੇ ਜੀ ਗਾਵਾਂ ਤੁਦ ਨੂੰ ਖਲਨੀ ਚਾਰੇ ਅੱਛਾ ਜੀ ਹਾਂ ਪਰ ਫਿਰ ਫਰਕ ਕੀ ਪਿਆ ਆਪ ਤਾਂ ਉਹ ਕਹਿ ਰਹੇ ਆ ਰੈਣ ਹੀ ਗਾਵਣਾ ਉਹ ਗਾਵਣਾ ਨੇ ਧਿਆਨ ਲੱਗਦੇ ਨੇ ਸਾਰੇ ਜੀ ਜਲ ਤੇਰੇ ਧਿਆਨ ਲੱਗਦੇ ਹੀ ਨੇ ਹਰ ਇੱਕੇ ਲੱਗਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਾਂ ਹੀ ਮੰਗਦੇ ਨੇ ਸਾਡੇ ਪਰ ਕੀ ਉਹ ਕਹਿੰਦੇ ਕਿ ਮੈਨੂੰ ਗਾਉਣ ਦਾ ਗੁਣ ਬਖਸ਼ੋ ਹਾਂਜੀ ਮੇਰਾ ਗਾਵਣਾ ਦੂਜੇ ਦਾ ਕਿਹਾਵਣੀ ਹੈ ਨਾ ਦਰਸ਼ਨ ਕਰ ਲਵੇ ਜਦ ਦੇਖਾਂ ਤਾਂ ਉਦਾਮ ਤੇ ਹਾਂ ਧਿਆਨ ਵਾਲੇ ਇੱਕ ਦੂਏ ਨੂੰ ਸੁਣ ਕੇ ਹਾਂ ਜੀ ਵੱਡਾ ਆਖਿਆ ਸਭ ਕੁਝ ਠੀਕ ਹੈ ਜੀ ਇੱਥੇ 25ਵੀਂ ਪੌੜੀ ਸਮਾਪਤੀ ਹੈ ਜੀ